ਜਿੱਚਰ ਮੂਲ ਨਾ ਥੁੜੀਂ ਦੋ ਜਿੱਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਕਾਹੇ ਖਰਚ ਤਨਮਾਲ ਜਿੱਚਰ ਮੂਲ ਨਾ ਥੁੜੀਂ ਦੋ ਉਹ ਨਾ ਜਿਹੜੇ ਥੋੜੀ ਆਉਂਦੀ ਰੂਪ ਦੀ ਜਾਨ ਦੀ ਥੋੜੀ ਆ ਸਕਦੀ ਮੂਲ ਬਿਲਕੁਲ ਵੀ ਥੋੜੀ ਆ ਸਕਦੀ ਆ ਕੇ ਲੰਗਰ ਦੀ ਥੋੜੀ ਪੈ ਸਕਦੀ ਜਿੱਚਰ ਆਪ ਕਿਰਪਾਲ ਜਿਨ੍ਹਾਂ ਚਿਰ ਸ਼ਬਦ ਜਿਨ੍ਹਾਂ ਚਿਰ ਪਰਮੇਸ਼ਰ ਦੀ ਕਿਰਪਾ ਹੈ ਜਿੰਨਾ ਜਦੋਂ ਬੁਲਾ ਰਿਹਾ ਉਹਨਾਂ ਜਦੋਂ ਬੋਲਣ ਦੇ ਵਿੱਚ ਕੋਈ ਕਮੀ ਨਹੀਂ ਆ ਸਕਦੀ ਜਦੋਂ ਬੁਲਾਉਣ ਵਾਲਾ ਸਿੱਧਾ ਬੋਲਣ ਵਾਲੇ ਕੋਲ ਕਿਸੇ ਗੱਲ ਦੀ ਕਮੀ ਨਹੀਂ ਆ ਸਕਦੀ ਸ਼ਬਦ ਉਹ ਖੁੱਟ ਬਾਬਾ ਇੱਥੇ ਕੌਮਾਂ ਦਾਣਾ ਹੋਊਗਾ ਬਾਬਾ ਨਾਲ ਕਾ ਖਾਏ ਖਾੜੇ ਤੁਨ ਮਾਲ ਜਿਹੜਾ ਬਾਬਾ ਇਹਦਾ ਸ਼ਬਦ ਹੈ ਬਾਬੇ ਦਾ ਉਪਦੇਸ਼ ਹੈ ਉਹ ਖੁੱਟਾ ਉਹ ਕਿਤੇ ਵੀ ਖੋਟ ਨਹੀਂ ਉਹਦੇ ਕਮੀ ਨਹੀਂ ਹੈ ਕਿਤੇ ਸੱਚਾ ਸ਼ਬਦ ਦਾ ਸਾਡਾ ਸ਼ਬਦ ਉਹ ਇਹ ਜਿੰਨਾ ਖਾਏ ਖਾ ਇਹ ਤੁਨ ਮਾਲ ਖਾਣਾ ਖਰਚਣਾ ਚਾਹੀਦਾ ਇਹਨੂੰ ਖਰਚ ਵੀ ਰੱਜ ਕੇ ਖਾ ਵੀ ਰੱਜ ਕੇ ਤੇ ਖਰਚੇ ਵੀ ਦਬਕੇ ਇਹ ਕੋਠ ਨਹੀਂ ਆ ਇਹਦੇ ਵਿੱਚ ਸੱਚ ਸ਼ਬਦ ਹੈ ਸੱਚ مطلب ਸ਼ਬਦ ਗੁਰੂ ਦਾ ਸ਼ਬਦ ਹੈ ਪਰਮੇਸ਼ਰ ਦਾ ਕਦੇ ਖੰਦੇ ਕੀ ਟੁੱਟਣਾ ਆ ਬਈ ਹਾਂਜੀ ਠੀਕ ਹੈ ਜੀ ਕਿਉਂਕਿ ਇਹ ਮਾਇਆ ਤੋਂ ਬਾਹਰ ਦਾ ਸ਼ਬਦ ਹੈ ਤਾਂ ਹੀ ਇਹ ਸੀਮਾ ਤੋਂ ਬਾਹਰ ਹੈ ਜੀ ਅਸੀਮ ਹੈ ਹਾਂਜੀ ਜੀ ਬਤਵਾ ਠੀਕ ਹੈ ਜੀ ਇੱਥੇ 20ਵੇਂ ਸ਼ਲੋਕ ਦੀ ਸਮਾਪਤੀ ਹੈ ਜੀ